ਹਾਂਜੀ ਦਸਵੀਂ ਪੌੜੀ ਸ਼ੁਰੂ ਹੈ ਜੀ ਅਸ਼ਟਮੀ ਅਸ਼ਟ ਸਿੱਧ ਬੁੱਧ ਸਾਧ ਹੈ ਸਤਿ ਨਹਿ ਕੇਵਲ ਤਰਮਈ ਅਦ ਹੈ ਹਾਂ ਉਹ ਤੇ ਪਿੱਛੇ ਆਇਆ ਉਹਦੇ ਵਿੱਚ ਜਿਤ ਕੋ ਸਿੱਧ ਸਭ ਬੁੱਧ ਅਸ਼ਤ ਸਿੱਤੀ ਸਭ ਬੁੱਧੀ ਦਾ ਮਤਲਬ ਅੱਠ ਜਿਹੜੇ ਰੱਖੇ ਹੋਏ ਇੱਕ ਦੇ ਨਾਲ ਊਪਕਾਰ ਸਤਨਾਮ ਕਰਤਾ ਪੁਰਖ ਨਿਰਪੁਰ ਨਿਰਵੈਰ ਅਕਾਲ ਪੁਰਖ ਸਾਰੇ ਪੰਥ ਇਹਨਾਂ ਦੇ ਗੀਤ ਸੋਝੀ ਆ ਨਾ ਸਮਝ ਆ ਪੂਰੀ ਜੇ ਦੀਪ ਸਮਝ ਆ ਗਈ ਇਹਨਾਂ ਦੀ ਸਾਰੀ ਪੂਰਨ ਗੁద్ధి ਸਾਰੀ ਉਹ ਗੁੱਧ ਸਮਝ ਆ ਗਈ ਸਾਰੇ ਸਮਝ ਆ ਗਿਆ ਤਿੰਨ ਲੋਕ ਦਾ ਗਿਆਨ ਇਹ ਸਮਝ ਆ ਗਿਆ ਉਸੇ ਦਾ ਖਲਾਸਾ ਕੀਤਾ ਹੋਇਆ ਸਾਰੀ ਗੁਰਬਾਣੀ ਚ ਜਿਹਨੂੰ ਅਸੀਂ ਗੋਲ ਮੰਤਰ ਕਹਿੰਦੇ ਆ ਮੰਤਰ ਦਾ ਮੂਲ ਹੈ ਗੁਰਬਾਣੀ ਦਾ ਮੂਲ ਹੈ ਉਹ ਅੱਗੇ ਗੁਰਪ੍ਰਸਾਦ ਦਾ ਗੁਰਬਾਣੀ ਹੈ ਸਾਰੀ ਇਹ ਗੁਰਪ੍ਰਸਾਦ ਹੈ ਸਾਰੀ ਬਾਣੀ ਉਹਨਾਂ ਦਾ ਗਿਆਨ ਦਿੱਤਾ ਹੋਇਆ ਹੈ ਦਾ ਇਹ ਕਿਹਾ ਇੱਕ ਦੇ ਅੱਠ ਪੱਖ ਦਿਖਾਏ ਨੇ ਅੱਠਾਂ ਪੱਖਾਂ ਨੂੰ ਵਿਆਖਿਆ ਅੱਠ ਪੱਖ ਵਿਆਖਿਆ ਗੁਰਬਾਣੀ ਜਪਣਾ ਇਹਨੂੰ ਜਪਣ ਦਾ ਮਤਲਬ ਹੈ ਲੋਕ ਦਾ ਗਿਆਨ ਪ੍ਰਾਪਤ ਹੋਜੂ ਤੇ ਲੋਕ ਦਾ ਗਿਆਨ ਗੁਰਬਾਣੀ ਠੀਕ ਹੈ ਪਰ ਜਿਹੜੀ ਅਸ਼ਟ ਦੇ ਬਾਰੇ ਸਿੱਧ ਬੁੱਧ ਲੈਣੀ ਹੈ ਜੀ ਇਹ ਦੱਸਣਾ ਚਾਹੁੰਦੇ ਹਾਂ ਅਸ਼ਟ ਅਸ਼ਟ ਨੰਬਰ ਤੇ ਇਹ ਅਸਤ ਦੀ ਕਾਇਆ ਦੀ ਜਿਹੜੀ ਸਮਝ ਹੈ ਸੋਝੀ ਹੈ ਜੀਰੀਵੰਦ ਨੂੰ ਸੋਚ ਉਹ ਜਦ ਬੁੱਧ ਸਾਧੀ ਜਾਣੀ ਹੈ ਉਹਦੇ ਨਾਲ ਸਾਧਣੀ ਹੈ ਬੁੱਧੀ ਉਹਦੇ ਨਾਲ ਬੁੱਧੀ ਸਾਧੀ ਜਾਂਦੀ ਹੈ ਜਿਹੜੀ ਅਸਾਧ ਬੁੱਧੀ ਸਾਡੇ ਬੁੱਧੀ ਦੀ ਵਿੱਚ ਕਮੀ ਹੈ ਕਮੀ ਦੂਰ ਹੋਣੀ ਹੈ ਦੀ ਕਮੀ ਦੂਰ ਹੋਣੀ ਸਮਝ ਦੀ ਜਿਹੜੀ ਕਮੀ ਹੈ ਸਾਡੀ ਉਹ ਦੂਰ ਹੋਣੀ ਅੱਜ ਜਿਹੜਾ ਹੈਗਾ ਇਹ ਕੇਵਲ ਕਾਜਵੀ ਅਰਾਧਾ ਹੈ ਸੱਚ ਦੀ ਅਰਾਧਨਾ ਕੇਵਲ ਉਹਦੀ ਕਿਰਪਾ ਤੋਂ ਭੁੱਖ ਜਗਦੀ ਹੋਈ ਭੁੱਖ ਹੈ ਜਿਹੜੀ ਦਾ ਢਾਂ ਤੇ ਰੋਟੀ ਬਲੇ ਰਹਿੰਦਾ ਜਿਹਦੇ ਅੰਦਰ ਸੱਚ ਦੀ ਭੁੱਖ ਹੈ ਉਹ ਸੱਚ ਦੀ ਅਰਾਧਨਾ ਨਹੀਂ ਕਰਦਾ ਸੱਚ ਮਿਲੇ ਨਾਨਕ ਜਾਨਾ ਨਾਨਕ ਸੰਤ ਮਿਲੇ ਸੱਚ ਪਾਈ ਹੈ ਕਹਿੰਦਾ ਜੇ ਸੰਤ ਨਾਲ ਸੱਚ ਉਰੇ ਕੋਲ ਸੱਚ ਮਿਲ ਜੇਵੇ ਸੱਚ ਭੁੱਖ ਹੈ ਹਾਂਜੀ ਕੌਣ ਪਾਣੀ ਅਗਨੀ ਵਿਸਰਾਉ ਕਹੀਂ ਨਿਰੰਜਨ ਸੱਚੋ ਨਾਉ ਆਹ ਕੌਣ ਪਾਣੀ ਅਗਨੀ ਮਾਇਆ ਤੇ ਵਿਸਰ ਜਾਂਦੀ ਹੈ ਜਦੋਂ ਸੱਚ ਦੀ ਇਰਾਜ਼ ਨਾ ਹੁੰਦੀ ਹੈ ਨਾਮ ਦੀ ਭੁੱਖ ਭੁੱਖ ਨਹੀਂ ਲੈਂਦੀ ਫਿਰ ਮਾਇਆ ਦੀ ਭੁੱਖ ਕੌਣ ਪਾਣੀ ਅਗਨੀ ਮਾਇਆ ਹੀ ਹੈ ਨਾ ਵਿਸਰਾਉ ਜੇ ਦੀ ਭੁੱਖ ਨਹੀਂ ਰਹਿੰਦੀ ਜੇ ਲੋੜ ਨਹੀਂ ਰਹਿੰਦੀ ਉਹ ਤਾਂ ਮਾਇਆ ਵਿੱਚੋਂ ਦਾਸੀ ਆ ਉਹਨੂੰ ਲੋੜ ਹੀ ਨਹੀਂ ਇਹਦੀ ਲੋੜ ਸਰੀਰ ਨੂੰ ਤਾਂ ਰਹਿੰਦੀ ਹੈ ਉਹਨੂੰ ਨਹੀਂ ਰਹਿੰਦੀ ਆਤਮਾ ਦੀ ਭੁੱਖ ਨਹੀਂ ਹੈਗੀ ਦੀ ਭੁੱਖ ਟੈਂਪਰੇਰੀ ਚੀਜ਼ ਹੁੰਦੀ ਹੈ ਲੋੜ ਮ ਚੀਜ਼ ਹੈ ਜਿੱਥੇ ਬਿਸਰ ਰਹੀ ਹੈ ਨਾ ਮਾਇਆ ਜਿਹੜੇ ਘਰ ਚ ਬਹਿ ਕੇ ਜਿੱਥੇ ਆਪੇ ਮਾਇਆ ਵਿਚਰ ਜਿਏ ਜੋ ਪੁਆਇੰਟ ਤੇ ਉੱਥੇ ਹੀ ਨਿਰੰਝਨ ਸਾਚਾ ਰੂਪ ਉੱਥੇ ਹੀ ਨਿਰੰਝਨ ਤੇ ਪ੍ਰਾਪਤੀ ਹੈ ਉੱਥੇ ਹੀ ਨਾਮ ਦੀ ਇੱਥੇ ਮਰ ਜਨਮ ਜਰਾ ਨਹੀਂ ਹੈ ਇੱਥੇ ਹੀ ਬਹਿ ਜਾਓ ਇੱਥੇ ਹੀ ਸਹ ਹੋ ਜਾਓ ਇੱਥੇ ਸਭ ਕੁਝ ਪ੍ਰਾਪਤੀ ਹੈ ਕਬੀਰ ਕੀ ਕਹਿੰਦਾ ਗੰਗ ਜਮਨ ਕੇ ਅੰਤਰੇ ਸਹਜ ਸੁਨਕੇ ਕਹਾਟ ਇਹੀ ਸਹਜ ਸੁਨਕਾ ਕਹਾਟ ਸਹਿਜ ਔਰ ਸੁਣ ਮਨ ਸੁਣਨਾ ਦੁਆ ਸਹਿਜ ਚਿਤ ਸਹਿਜ ਮਨ ਚੁੱਪ ਕਰ ਗਿਆ ਸੁਣ ਲਈ ਚੁੱਪ ਕਰ ਗਿਆ ਮਨ ਮਨ ਤਾਂ ਆਪਣੀ ਮਰਜ਼ੀ ਛੱਡਤੀ ਗੁਰ ਕੀ ਮਰਜ਼ੀ ਚੱਲਦੀ ਹੈ ਗੁਰ ਕੇ ਚ ਬੈਠਾ ਫਿਰ ਹੋਇਆ ਬੈਠਾ ਇੱਤੇ ਹੀ ਥਿਰ ਕਰ ਬੈਠੋ ਹਰ ਜਨ ਪਿਆਰੇ ਹਰ ਜਨ ਮਣਿਆ ਫਿਰ ਹੋਇਆ ਬੈਠਾ ਸਤਗੁਰ ਤੋਂ ਬਰੇ ਕਾਸਵਾਰੇ ਅਗਲਾ ਕਾਜ ਫੇ ਸਤਗੁਰੇ ਸਵਾਲਦਾ ਉੱਥੇ ਹੀ ਬਹਿ ਜੋ ਕਹਿੰਦੇ ਕਾਹਾਂ ਜਾਣ ਦੀ ਫੇ ਲੋੜ ਨਹੀਂ ਇਸ ਮੈਂ ਮਨੁਆ ਰਹਾ ਲਿਬਲਾਏ ਕਿਉਂਕਿ ਨਾਨਕ ਕਾਲ ਨਾ ਖਾਏ ਇਸ ਮੈਂ ਮਨੁਆ ਰਹਾ ਲਿਬਲਾਏ ਐਸ ਜਗ੍ਹਾ ਫਿਰ ਕਾਲ ਨਹੀਂ ਖਾਂਦਾ ਹੈ ਆ ਗਿਆ ਨਾਨਕ ਵੱਡਾ ਘਰ ਜਿੱਥੇ ਨਿਰਤਨ ਜਨਮ ਜਰਾ ਨਾ ਹੈ ਜਰਾ ਲੋਗ ਹੈ ਨਾ ਇੱਥੇ ਮੌਤ ਹੈ ਮੈਂ ਤਾਂ ਜਨਮ ਵਿੱਚ ਕੁਝ ਵੀ ਨਹੀਂ ਹੈ ਇਹ ਇਹ ਜਗਾਦਾਸ ਸੀ ਠੀਕ ਹੈ ਅਸ਼ਮੀ ਸੀ ਨਾ ਸਰੀਰ ਹੁਣ ਉਹਦੇ ਨਾਲ ਜੁੜ ਗਿਆ ਜਾਨੂੰ ਪਦਾਰਥ ਮਿਲ ਗਿਆ ਹੁਣ ਜਦੋਂ ਅੱਠ ਤਾਤਾਂ ਪੂਰੀਆਂ ਹੋ ਗਈਆਂ ਫੇਰ ਨਾਨਕ ਕਾਲ ਨਾ ਖਾਏ ਠੀਕ ਹੈ ਫੇਰ ਕਾਲ ਕਾਲ ਖਾ ਉਹ ਇਹਨਾਂ ਨੇ ਅੱਠ ਤਾਤਾਂ ਦੀ ਮੂਰਤੀ ਬਣਾ ਕੇ ਉਹਨੂੰ ਸੰਪੂਰਨ ਸਮਝ ਲਿਆ ਇਹਨਾਂ ਨੇ ਹਰ ਸਾਰੇ ਮਾਇਆਜ ਕਰ ਲਏ ਨਾ ਪੰਦ ਨੇ ਬਾਤ ਪਾਲ ਲਈ ਚੇਤਨ ਛੜਦਾ ਜਾਨ ਨਾਲ ਜੋੜਦੇ ਹਾਂ ਉਹ ਜਿਹੜਾ ਕਾਲਾ ਸੀ ਜਾ ਔਰ ਬਗਲਾ ਉਹ ਵੀ ਬਾਹਰੇ ਬਣਾ ਲਏ ਹਾਂ ਬਾਹਰੇ ਬਣਾਉਣੇ ਤੇ ਅੱਖਾਂ ਨਹੀਂ ਬਾਹਰ ਬਣਨੀ ਬੈਠੇ ਉਹਦੀਆਂ ਫਰੀਦ ਵੀ ਬਣਾਈ ਬੈਠੇ ਨੇ ਅੱਖਾਂ ਬਲਵਾਨਾਂ ਦੀਆਂ ਕਦਾ ਨੇ ਤਾਗਾ ਕਰੰਗ ਟੰਡੂ ਸਗਲਾ ਖਾਇਆ ਮਾਸ ਵੀ ਰੱਖਾਂ ਕਿਵੇਂ ਬਚ ਗਿਆ ਹਾਂਜੀ ਹਰਦਾ ਕਿਵੇਂ ਦਿਲੇ ਨਹੀਂ ਬਣਿਆ ਫੇਰ ਜਿਉਂਦਾ ਕਿਵੇਂ ਆ ਉਹ ਤਾਂ ਕਰੰਗ ਹੈ ਕਰੰਗ ਦੇ ਵਿੱਚ ਪ੍ਰਾਣ ਹੁੰਦੇ ਨੇ ਤੇ ਹੁਣ ਨਹੀਂ ਦਿਖਾਉਂਦੇ ਉਹ ਹਟ ਗਏ ਹੁਣ ਤੋਂ ਜੀ ਕੋ ਜੀ ਇੱਥੇ 10ਵੀਂ ਪੌੜੀ ਤੋਂ ਆਪਤੀ ਹੈ ਜੀ 11ਵੇਂ ਬਾਅਦ ਸ਼ੁਰੂ ਕਰਦੇ ਹਾਂ ਜੀ ਨੌਂ ਨੌਵੀਂ ਨਵੇਂ 나ਥ ਨਵਖੰਡਾ ਘਟ ਘਟ 나ਥ ਮਹਾ ਬਲਵੰਡਾ ਨੌਂ ਨੌਵੀਂ ਨਵੇਂ ਨਵ ਇਹ ਜਿਹੜਾ ਨਾਮ ਹੈ ਨਾ ਹਾਂਜੀ 9ਵੇਂ ਨੰਬਰ ਤੇ 9ਵੇਂ ਨੰਬਰ ਤੇ ਨਾਮ ਦੀ ਗੱਲ ਹੈ 9ਵੀ ਨਵਾਂ ਖੰਡਾ ਨਾ ਉਹ ਇੱਥੇ ਨਾਥ ਵੀ ਹੋਰ ਹੈ ਬਾਲਾ ਨਾਥ ਨਹੀਂ ਹੈਗਾ ਜੋ ਕਿ ਜਿਹੜੇ ਨਾਮ ਨੇ ਇਹ ਨਵੇਂ ਨਾਥ ਹੈ ਇਹਨਾਂ ਨੇ ਨਵਾਂ ਨਾਥ ਕਰ ਲਿਆ ਜਵੇਂ ਲਾਉਂਦਾ ਨਿਊ ਨਾਥ ਹੈ ਘਟ ਘਟ ਨਾਥ ਨਾਥ ਜਿਹੜਾ ਫਿਰਦੇ ਵਿੱਚ ਨਾਥ ਹੈ ਜਿਹਦੇ ਮੰਦਿਰ ਨਤ ਪਾਈ ਹੋਈ ਹੈ ਉਹ ਨਾਥ ਨਹੀਂ ਹੈ ਉਹ ਬਗਾਨ ਨਾਥ ਹੋਈ ਹੈ ਨਾਥ ਨਵਖੰਡਾ ਇਹ ਖੰਡ ਵੀ ਨਵਾਂ ਹੀ ਆ ਸੱਚਖੰਡ ਆ ਬਾਹਲੇ ਖੰਡ ਨਹੀਂ ਹੈਗੇ ਝੂਠ ਖੰਡ ਨਹੀਂ ਹੈ ਇਹ ਨਵਾਂ ਖੰਡ ਹੈ ਸੱਚਖੰਡ ਦੁਨੀਆ ਖੰਡ ਦਾ ਨਹੀਂ ਪਤਾ ਹਾਂਜੀ ਨਾਥ ਹਰੇਕ ਘਟ ਦੇ ਵਿੱਚ ਨਾਥ ਦੇਖੋ ਇੱਕ ਵਚਨ ਹੈ ਨਾਥ ਇੱਥੇ ਹੈ ਨਾ ਨਾਥ ਕਿਵੇਂ ਬਣਾਤੇ ਫੋਂ ਤੋਂ ਦੇ ਫੜੀ ਜਾਓ ਤੁਸੀਂ ਉਹਨੂੰ ਸਾਫ ਸੰਭੂ ਵੀ ਉਹਨੇ ਕੀਤਾ ਕੀ ਐ ਇਹ ਰੌਲਾ ਕਾਡਾ ਪਾਉਂਦੇ ਨੇ ਵਿਆਕਰਣ ਨਾਲ ਕੀ ਜਾਣ ਬੁੱਝ ਕੇ ਉਹ ਬਲੀ ਰਾਜਾ ਹੋ ਬਲ ਬਲਵੰਡਾ ਆਈ ਸਾਰਾ ਪ੍ਰਭਾ ਦੇਸ ਆਦ ਰਖਵਾਰ ਆਈ ਪੁੱਤਾ ਇਹ ਜਗ ਸਾਰਾ ਸਾਰਾ ਜਗ ਕੀ ਦਾ ਆਈ ਪੁੱਤਾਂ ਆਈ ਪੁੱਤਾ ਕਿਉਂ ਕਹਿੰਦੇ ਨੇ ਜਗ ਮਾਤਾ ਕਹੇ ਹੈ ਦਸ਼ਮ ਪਾਸ਼ਾ ਨੇ ਉਹੀ ਆਈ ਪੰਥੀ ਵੀ ਨੇ ਨਾ ਆਈ ਪੰਥੀ ਸਗਲ ਆਈ ਨਾਮ ਮੇਟਣ ਕੋ ਸਮਰੱਥ ਉਹਦੀ ਸਮਰੱਥ ਮਾਤਾ ਉਹ ਆਈ ਹੈ ਹੁਕਮ ਹੈ ਉਹੀ ਆਈ ਹੈ ਉਹਨਾਂ ਨੇ ਜਗਮਾਤ ਕਹਤਾ ਤਾਂ ਸੰਪਾਸ਼ਲ 아이 ਪੁੱਤ ਆਏ ਜਗ ਸਾਰਾ ਤੂੰ ਮੇਰਾ ਮਾਤਾ ਜਿਹਨੂੰ ਕਹਿੰਦੇ ਨੇ ਉਹ ਮਾਈ ਨੂੰ 아이 ਕਹਤਾ 아이 ਜਨਮ ਪਾਲਣਾ ਵੀ ਕਰਦੀ ਹੈ ਜਨਮ ਦੇ ਵਿੱਚ ਮਦਦ ਵੀ ਕਰਦੀ ਹੈ ਤੇ ਕੀਪਾ ਬਣਿਆ ਜੀ 아이 ਪੁੱਤ ਇਹ ਜਗ ਸਾਰਾ ਹੁਕਮ ਦੇ ਨਾਲ ਜੋ ਹੈਗਾ ਸਾਰੇ ਜਗਤ ਦਾ ਜਨਮ ਹੋਇਆ ਹੈ ਹੁਕਮ ਨੂੰ ਤੁਰਕੀ ਬਾਣੀ ਕਿਹਾ ਹੈ ਤੁਰਕੀ ਬਾਣੀ ਆਈ ਸਗਲੀ ਚੰਦ ਮਟਾਈ ਪੁੱਤਾਂ ਆਈ ਦੇ ਪੁੱਤਰ ਰੂਪ ਨੂੰ ਪੈਦਾ ਕੀਤਾ ਹੈ ਤਾਂ ਇਹਦਾ ਫਿਰ ਖਿਆਲ ਵੀ ਰੱਖਦਾ ਉਹ ਖਿਆਲ ਆ ਤੋਂ ਜੀ ਜਦਾ ਜਿਵੇਂ ਉਸ ਪ੍ਰਭ ਨੂੰ ਆਦੇਸ਼ ਹੈ ਅਸੀਂ ਤਾਂ ਉਹਦੇ ਸਾਹਮਣੇ ਸਿਰ ਹਾਰਤਾ ਜੋ ਸਾਡਾ ਸਿਰ ਰ ਆਤੋ ਲੈ ਕੇ ਸਾਰੇ ਜਗ ਦਾ ਹੀ ਧਿਆਨ ਲਖ ਰਿਹਾ ਹੈ ਪਾਲਣ ਕਰ ਰਿਹਾ ਹੈ ਰਾਖੀ ਕਰ ਰਿਹਾ ਰਖਵਾਰ ਆ ਉਹ ਪਰ ਆਦ ਜਦੋਂ ਜੱਜ ਸਾਰਾ ਕਹੇ ਤੱਕਦਾ ਮੈਂ ਜਗ ਦਾਲ ਹੀ ਹੈ ਜਗ ਤਾਂ ਹੀ ਹੈ ਜੇ ਸਰੀਰ ਨਾਲ ਜੁੜਿਆ ਹੈ ਤਾਂ ਜਗਾ ਤੇ ਉਹ ਮਨ ਦਾ ਰਖਵਾਰ ਹੈ ਪ੍ਰਭ ਪ੍ਰਭ ਕਰਕੇ ਵੀ ਰਖਵਾਰ ਹੈ ਨਾਲ ਹੀ ਡਵੈਲਪਮੈਂਟ ਹੈ ਸਰੀਰ ਨੇ ਕਰੀ ਇਹ ਦਾ ਪਾਉਣ ਪਾਣੀ ਬਸੰਤਰ ਕਾਦੇ ਵਾਸਤੇ ਥਾਰਾ ਕੁਝ ਪਾਇਆ ਜੋ ਇੱਕ ਆਦ ਸੂਰਜ ਚਤੰਤ ਧਾਰੇ ਅਬ ਸਭ ਕੋਲ ਬਣਾਇ ਆਦ ਜੁਗਾਦੀ ਹੈ ਭੀ ਹੋਗ ਉਹ ਲੈ ਕੇ ਸਮਾਂ ਸ਼ੁਰੂ ਹੋਇਆ ਹਣ ਜਦੋਂ ਤੋਂ ਮਾਇਆ ਸ਼ੁਰੂ ਹੋਈਆ ਸਾਚੇ ਤੇ ਪਗਨਾ ਪਿਆ ਜਾਪੇ ਜੁਗ ਸ਼ੁਰੂ ਹੁੰਦੇ ਨੇ ਹਨ ਕੋਈ ਸਮਾਂ ਨਹੀਂ ਹੁੰਦਾ ਸਮਾਂ ਲਗੂ ਨਾ ਸਰ ਮਾਇਆ ਤੇ ਜਦ ਮਾਇਆ ਵਰਿਆ ਜਿਹਾ ਸਮਾਂ ਹੋਇਆ ਜਾਂ ਚੰਦ ਸੂਰਜੇ ਦੀ ਸਮਾਂ ਕਿੱਥੋਂ ਹਣ ਕਾਲ ਕਾਲ ਸਮੇਂ ਨੂੰ ਵੈਣੇ ਤੇ ਕਹਿੰਦੇ ਹਾਂ ਜੇ ਸਮਾਂ ਦਾ ਕਾਲ ਜੇ ਸਮੇਂੀ ਦਾ ਕਾਲ ਭਾਇਆ ਨਾਲੇ ਸਮਾਂ ਨਾਪਿਆ ਜਾਂਦਾ ਕਿੰਨੀ ਕੋਈ ਚੀਜ਼ ਪੁਰਾਣੀ ਹੈ ਅੱਜ ਤੱਕ ਡੱਕੋ ਦੱਸੇ ਨਹੀਂ ਸਕਦਾ ਇਹ ਪਰੰਪਰ ਹੋਤਾ ਆਇਆ ਕਹਿ ਨਾ ਸਕੈ ਕੋ ਕਹਿ ਸਕਦਾ ਇਹਨੂੰ ਆਤਮਾ ਨੂੰ ਕਿ ਕਦੋਂ ਹੁੰਦੀ ਅੱਜ ਤਾਈਂ ਕਿਸੇ ਨੇ ਨਹੀਂ ਕਿਹਾ ਹੈ ਇਸ ਆਦੇ ਜੁਗਾਤੀ ਹੈਪੀ ਹੋਊਗਾ ਵੀ ਹੈ ਆ ਜੁਗਾਤ ਹੋਏ ਔਰ ਰਹੂਗਾ ਵੀ ਤਾਂ ਮੈਨੂੰ ਹੋਊਗਾ ਵੀ ਰਹੂਗਾ ਵੀ ਕੋਈ ਆਹ ਸੱਚ ਜੁਗਾਦ ਸੱਚ ਹੈਪੀ ਸੱਚ ਜੁਗਾਦੀ ਵੀ ਨਾਲ ਹੈਪੀ ਕੀ ਹੋਗ ਚਾਰੇ ਆ ਗਏ ਠੀਕ ਹੈ ਕਰਨਾ ਜੋ ਉਹ ਪਰੰਪਰਾ ਤਨਹ ਜੋਗ ਹੈ ਪਰ ਇਹ ਤੋਂ ਪਰੇ ਹੈ ਉਹ ਕੁਝ ਸਾ ਵੀ ਕੋਈ ਸ਼ਕਤੀਸ਼ਾਲੀ ਹੋਵੇ ਉਹ ਤੋਂ ਵੀ ਸ਼ਕਤੀਸ਼ਾਲੀ ਹੈ ਕਰਨ ਜੋਗ ਹੈ ਉਹ ਸਭ ਕੁਝ ਕਰ ਸਕਦਾ ਕਰਨ ਦੀ ਤੁਮ ਲੱਭਦਾ ਕੋਈ ਤੱਲ ਨਹੀਂ ਦੇ ਸਕਦਾ ਉਹਦੇ ਵਿੱਚ ਜੋ ਦੀ ਮਰਜ਼ੀ ਉਹ ਕਰਦਾ ਜੋ ਦਾ ਹੁਕਮ ਦਾ ਹਟਲ ਹੈ ਕੋਈ ਰੋਕ ਸਕਦਾ ਹਾਂਜੀ ਠੀਕ ਹੈ ਪਰ ਇਹ ਜੋ ਵੀ ਹੈ ਪ੍ਰਭ ਬਾਰੇ ਕਿਹਾ ਹੈ ਪਰ ਆਮ ਜੋ ਟੀਕਾ ਕਰ ਉਹ ਇਹਨੂੰ ਪ੍ਰਭ ਦੇ ਅਰਥ ਪ੍ਰਭੂ ਕਰਦੇ ਆ ਉਹ ਪਰਮੇਸ਼ਰ ਬਣਾ ਦਿੰਦੇ ਇਹਨੂੰ ਹਾਂਜੀ ਡਾਲ ਦਾ ਕਨਸੈਪਟ ਜਿਹੜਾ ਛੱਡਦਾ ਨਾ ਬਿਲਕੁਲ ਉਹ ਫਿਰ ਐਵੇਂ ਖਲੋ ਉਹਨਾਂ ਕੋਲ ਤਿੰਨ ਹੀ ਜੋ ਆਦਤੋਂ ਸਬਦਾ ਰਖਵਾਲਾ ਹੈ ਉਹ ਉਹੀ ਗੱਲ ਹੈ ਉਹਨਾਂ ਕੋਲ ਦੋ ਨੇ ਤੀਆ ਹੀ ਨਹੀਂ ਹਾਂ ਡਾਲ ਹੈ ਠੀਕ ਹੈ ਜੀ ਹਾਂ ਜੀ ਇੱਥੇ ਇੱਥੇ ਸਮਾਪਤੀ ਹੈ ਜੀ 12ਵੀਂ ਸ਼ੁਰੂ ਕਰਦੇ ਹਾਂ ਜੀ 10ਵੀਂ ਨਾਮਦਾਨ ਇਸ਼ਾਨ ਆਂਦਿਨ ਮੱਜਨ ਸੱਚਾ ਗੁਣ ਗਿਆਨ 10ਵੀਂ ਨਾਮਦਾਨ ਇਸ਼ਾਨ 10 ਨੰਬਰ ਦਾ ਕਹਿੰਦੇ ਨਾਮ ਦਾਨ ਇਸ਼ਾਨ ਨਾਮ ਦਾ ਦਾਨ ਹੈ ਨਾਮ ਨਾਲ ਇਸ਼ਾਨ ਹੈ ਜਿਹੜੇ 10ਵੇਂ ਦਵਾਰ ਚ ਚਲੇ ਗਏ ਨਾਂ ਦਾ ਬਾਹਲਾ ਗਿਆਨ ਹੈ ਦੁਨੀਆ ਉੱਥੇ ਲੋੜ ਨਾਂ ਬਾਹਲੇ ਦਾਨ ਦੀ ਲੋੜ ਹੈ ਨਾਵਾਂ ਵਾਲੇ ਹੀ ਲੋੜਾ ਨਾਮ ਦਾ ਹੀ ਦਾਣਾ ਨਾਮ ਨਾਲੇ ਇਸ਼ਾਨ ਨਾਮ ਦੀ ਉਹ ਕਮਾਈ ਹੈ ਉੱਥੇ ਸਭ ਕੁਝ ਨਾਨਕ ਕੇ ਕਰ ਕੇ ਕੇਵਲ ਨਾਮ ਹੈ ਜੀ ਆਹ ਅਜਨਾਨ ਦੇ ਘਰ ਫਿਰ ਉੱਥੇ ਨਾਮ ਹੀ ਨਾਮ ਹੋ ਰਹੀ ਦੀ ਬਸ ਬਾਕੀ ਬਾਕੀ ਦਿਮਾਗੇ ਬਾਕੀ ਬਰੇਲ ਤੇ ਛੱਡ ਜਾਂਦਾ ਪਸ਼ੂ ਡੰਗਰ ਤੇ ਨਾ ਹਾਂ ਜੀ ਪਸ਼ੂ ਉਹਦੀ ਖਰਾਕ ਅਸਵਾਨੀ ਖਰਾਕ ਪਸੂਣ ਦੇ ਘਰ ਛੱਡਿਆਂ ਦੀ ਬੰਦੇ ਵਾਲੀ ਖਰਾਕ ਬੰਦੇ ਦੇ ਘਰ ਆਂ ਦਿਨ ਮੱਜਨ ਸੱਚਾ ਗੁਣ ਗਿਆਨ ਬਸ ਆਂਦਨ ਕੀ ਮੱਜਨ ਸੱਚਾ ਗੁਣ ਗਿਆਨ ਸੱਚਾ ਗੁਣ ਗਿਆਨ ਦੇ ਵਿਚਾਰ ਸੱਚ ਦਾ ਗਿਆਨ ਉਸ ਹੁੰਦਾ ਇੱਥੇ ਮੱਜਨ ਵਿਚਾਰ ਹੁੰਦਾ ਨਾ ਹੋਇਆ ਵਿਚਾਰ ਹੁੰਦਾ ਉੱਥੇ ਮੱਜਨ ਵੀ ਨਾਲੇ ਹੋ ਰਿਹਾ ਸੱਚੇ ਗੁਣ ਗਿਆਨ ਦੇ ਵਿੱਚ ਮੱਜਨ ਹੋ ਰਿਹਾ ਬਸ ਗੁਣਾ ਦੀ ਵਿਚਾਰ ਹੋ ਰਹੀ ਹੈ ਗਿਆਨ ਪ੍ਰਾਪਤ ਹੋ ਰਿਹਾ ਉਹੜ ਮੈਂ ਗਿਆਨ ਪ੍ਰਾਪਤ ਹੋਏ ਨੇੜੇ ਨਹੀਂ ਆਉਂਦਾ ਸੱਚ ਦੇ ਵਿਲੰਮ ਨ ਤੂਟਸ ਕੱਚੇ ਤੱਗੈ ਉਹ ਕੱਚੇ ਤਾਗੇ ਨੂੰ ਕਹਿੰਦੇ ਵੀਰੇ ਨਹੀਂ ਨਦੀ ਟੁੱਟਣੂ ਜਿਹੜੇ ਕੱਚੇ ਤਾਗੇ ਦੇ ਮਾਇਆ ਦੇ ਬਿਲ ਮਾਇਆ ਦੀ ਨਾਲ ਸੁਰਤ ਜੁੜੀ ਹੋਈ ਹੈ ਜਿਵੇਂ ਜੋਗੀਆਂ ਦੀ ਹੈ ਉਹਨੂੰ ਕੀ ਉਹਦਾ ਸੁਰਤ ਛੱਕ ਟੁੱਟ ਜਾਂਦੀ ਹੈ ਇੱਥੇ ਕਦੇ ਟੁੱਟ ਜੂਗੀ ਅੰਦਰ ਇੱਥੇ ਤਾਂ ਲੱਗਦੀ ਜਿਹੜੇ ਦਿਮਾਗ ਦੇ ਵਿੱਚ ਤਕਾਉਂਦੇ ਨੇ ਸੁਰਤ ਨੂੰ ਟੁੱਟ ਜਾਣ ਨੂੰ ਉਹਨੂੰ ਨਹੀਂ ਤੇ ਲੱਗਦੀ ਕੱਚੇ ਧਾਗੇ ਨੂੰ ਮਾਇਆ ਨਾਲ ਜੁੜੀ ਹੋਈ ਸੁਰਤ ਹੈ ਉਹ ਬਿਲ ਮਨਵਾਗਤ ਤੇ ਦੇਹ ਲੱਗਦੀ ਕੱਚੇ ਧਾਗੇ ਨੂੰ ਟੁੱਟਣ ਦੀ ਜਿਵੇਂ ਐਵੇਂ ਧਿਆਨ ਟੁੱਟ ਜਾਂਦਾ ਉਹ ਤਾਗਾ ਜਗ ਏਵੇਂ ਜਾਣੋ ਅਸਥਿਰ ਚੀਤ ਸਾਚ ਰੰਗ ਮਾਣੋ ਤਾਗਾ ਵੀ ਰਸਤਾ ਵੀ ਤਾਗਾ ਕੀ ਜਿਹਨੂੰ ਕਿਹਾ ਅਸੀਂ ਇੱਥੇ ਜੋ ਤਾਗਾ ਜੱਗ ਇਹਵੇਂ ਜਾਣੋ ਜੱਗ ਨਾਲ ਜਿਹੜੀ ਸੁੱਤ ਜੁੜੀ ਨਾ ਸਰੀਰ ਨੂੰ ਨਾਲ ਮਾਇਆ ਨਾਲ ਉਹ ਤਾਗਾ ਬਸ ਜੱਗ ਤਾਗਾ ਹੀ ਐ ਇਹਨੂੰ ਕੱਚਾ ਤਾਗਾ ਕਿਹਾ ਹਾਂ ਅਸਥਿਰ ਜਿਹੜਾ ਚਿੱਤ ਆ ਉਹ ਅਸਰ ਉਹ ਨਹੀਂ ਹਿਲਦਾ ਉਹ ਨਹੀਂ ਦੋਲਦਾ ਡੋਲਦਾ ਨਾ ਅਸਰ ਲੈ ਗਿਆ ਹੋਇਆ ਫਿਰ ਨਹੀਂ ਲਿਖਿਆ ਹੋਇਆ ਹਾਂ ਜਿੰਨਾ ਚਿਰ ਸਰੀਰ ਹੈ ਉਹਨਾਂ ਚਿਰ ਹੁੰਦਾ ਉਹ ਵਿੱਚ ਰਹਿਣਾ ਅਸਰ ਜੀਤ ਸਾਚ ਰੰਗ ਬਣੋ ਚਿੱਤ ਟਿਕਿਆ ਹੋਇਆ ਤਾਂ ਹੀ ਸੱਚ ਦੇ ਰੰਗ ਜਿਹੜੇ ਹੈ ਬਣ ਜਾ ਸਕਦੇ ਨੇ ਅੱਜ ਤੇ 12ਵੀਂ ਪੌੜੀ ਸਮਾਪਤੀ ਹੈ ਜੀ ਹਾਂਜੀ ਹਾਂਜੀ ਫੇਰ ਵੀ ਪੌੜੀ ਸ਼ੁਰੂ ਕਰਦੇ ਹਾਂ ਜੀ ਏਕਾ ਦਸੀ ਇਕ ਰਿਦੈ ਵਸਾਵੈ ਹਿੰਤਾ ਮਮਤਾ ਮੋਹ ਚੁਕਾਵੈ ਦੇਖੋ ਏਕਾ ਦਸੀ ਹੈ ਏਕਾ ਦਸੀ ਨੂੰ ਏ ਕਹਿੰਦੇ ਨੇ 11ਵੀਂ ਏਕਾ ਦਸੀ ਹਾਂਜੀ ਕਹਿੰਦੇ ਏਕਾ ਦਸੀ ਦਸ਼ਾਵਾਂ ਸਾਰੀਆਂ ਨਹੀਂ ਦੱਸ ਹਾਂਜੀ ਉਹ ਤਰਫ ਕਰ ਲਵੇ ਜਿਹੜਾ ਦਾਦ ਸਾਬਾਂ ਜੁੜਿਆ ਉਹ ਤਾਂ ਭਰਮ ਚ ਹੈ ਉਹਦਾ ਕਰੇ ਉਧਰ ਨੂੰ ਭੱਜੂ ਕਹਦੇ ਉਧਰ ਨੂੰ ਕਹਦੇ ਉਧਰ ਨੂੰ ਇਹ ਦਾਦ ਸਾਬਾਂ ਮਾਇਆ ਕਿ ਨਹੀਂ ਹੁਣ ਉਹ ਨਹੀਂ ਰਹੀਆਂ ਇੱਕੋ ਹੀ ਤੇ ਸ਼ਾਹ ਦੇ ਵਿੱਚ ਨਹੀਂ ਕੋਈ ਦਾਦ ਸਾਬਾਂ ਹੁੰਦੀ ਕੋਈ ਤੇ ਸ਼ਾਹ ਹੁੰਦੀ ਉੱਥੇ ਇੱਕ ਤੋਂ ਇੱਕੋ ਹੀ ਬਸਾਬਾ ਰਹਿੰਦੇ ਦੂਜਾ ਦਾਦ ਨੂੰ ਬਸਾਬਾ ਮੋਹ ਹੰਸ ਤੇ ਹੈ ਤੇ ਨਦੀਆਂ ਅੱਗ ਇਹ ਅਗਦੀਆਂ ਨਦੀਆਂ ਨੇ ਇਹ ਅਗਦੀਆਂ ਨਦੀਆਂ ਨੂੰ ਦੂਰ ਰੱਖੇ ਮਾਇਆ ਗੈਨਾ ਨਾ ਮਾਇਆ ਗਨ ਸਭ ਕੋਈ ਇਹ ਹਰ ਦੇ ਚੋਂ ਦੂਰ ਨੇ ਇਹਨੂੰ ਦੂਰ ਰੱਖੇ ਇਹ ਦਾਦੇ ਸਮਾਂ ਅਗ ਦੇ ਵਿੱਚ ਨੇ ਠੀਕ ਇੱਕ ਨਾਲ ਜੁੜ ਜਾਂਦਾ ਫਿਰ ਇਹ ਹਿੰਸਾ ਮਮਤਾ ਮਾਇਆ ਤੋਂ ਫਿਰ ਜੇ ਇੱਕ ਰਹਿ ਜੀ ਫਿਰ ਮਾਇਆ 'ਚ ਰਹੀ ਨਹੀਂ ਫਿਰ ਫਿਰ ਇਹਦਾ ਮਤਲਬ ਇਹ ਨਹੀਂ ਫਿਰ ਮਾਇਆ ਦਾ ਬਹੁਤ ਇਹ ਤੰਗੇ ਨਹੀਂ ਕਰਦਾ ਕਟਾਵਾਦਾ ਕੋਈ ਚੀਜ਼ ਤੰਗੇ ਨਹੀਂ ਕਰਦਾ ਜਾ ਸਭ ਜਾਸ ਕਰਦਾ ਜਮਣਾ ਮੰਨ ਲਾ ਨਹੀਂ ਤੰਗ ਕਰਦਾ ਲੋਭ ਨਹੀਂ ਤੰਗ ਕਰਦਾ ਲੋਭ ਲੈ ਰੁਰਦੀਓ ਨਹੀਂ ਰੱਖੇ ਮਾਇਆ ਮੋਹ ਜਿਹੜਾ ਹੰਸ ਹੰਸੁੰਦਾ ਹੈ ਬਦਲੇ ਦੀ ਭਾਵਨਾ ਜਦੋਂ ਲਾ ਕੇ ਗੱਲ ਕਰਨੀ ਕਿਤੇ ਦਾ ਬੁਰਾ ਕੀਤਾ ਹੋਇਆ ਨਾ ਬੁਰਾ ਦਾ ਉਹ ਅੰਦਰ ਰੱਖਣਾ ਆਪਣੇ ਉਹ ਹਿੰਸਾ ਉਹ ਹਿੰਸਾ ਉਹ ਕਿਤੇ ਦਾ ਬੁਰਾ ਸੋਚਣਾ ਵੀ ਹਿੰਸਾ ਹੀ ਹੈ ਸੋਚਣਾ ਹੀ ਹਿੰਸਾ ਮਾਰਨਾ ਨਹੀਂ ਤਾਂ ਸਕਦੇ ਹੀ ਨਹੀਂ ਨਾ ਉਹ ਸਕਦੇ ਠੀਕ ਉਹ ਜੇ ਸਕਦੇ ਮਾਰਤਾ ਹਾਂਜੀ ਫਿਰੇ ਕਰਾਏ ਆਪੇ ਆਪ ਖੁਦ ਹਲ ਆਤਮ ਜੀਨਾ ਹੈ ਆਵਰਤ ਜੀਨਾ ਇਹ ਆਤਮ ਬ੍ਰਤ ਆਤਮਾ ਦੀ ਆ ਆ ਚੀਜ਼ਾਂ ਤੋਂ ਧਿਆਨ ਰੱਖੇ ਫਿਰ ਤੁਮ ਮਮਤਾ ਨੂੰ ਮੋਤੋਂ ਇਹ ਨਹੀਂ ਅੰਦਰ ਰੱਖੀਦੀ ਹੁੰਦੀ ਹੈ ਹਿਰਦੇ ਚ ਇਹਨਾਂ ਨੂੰ ਨਾ ਖਾਵੇ ਹਾਂ ਜੀ ਮੈਂ ਇਹਨਾਂ ਨੂੰ ਖਾ ਮਾਇਆ ਜਹਿਰ ਹੈ ਠੀਕ ਹੈ ਇਹਨਾਂ ਤੋਂ ਬਰਤ ਰੱਖੇ ਕਿ ਆਪਾਂ ਤਾਂ ਅਸੀਂ ਤਾਂ ਪੰਜ ਸਰੀਰ ਦਾ ਹੀ ਰੱਖਦੇ ਆਂ ਆਹ ਉਹ ਪਖੰਡਾ ਤਾਂ ਹੀ ਨਾ ਕਿ ਆ ਤੱਤ ਇੱਕ ਤੱਤ ਐਥੇ ਔਕੜ ਤੱਤ ਇਹਨੇ ਪਤਾ ਨਹੀਂ ਕੀ ਯਾਰਥ ਕੀਤਾ ਹੋਵੇ ਤੁਹਾਡੇ ਸਾਹ ਸੁਣ ਉਹ ਜਿਹੜਾ ਬੰਦਾ ਸੇ ਕੀਤਾ ਇਹਨੇ ਕਰਤਾ ਹੋ ਹਲ ਪਾਵੇ ਬ੍ਰਤ ਆਤਮ ਜੇ ਆਤਮ ਬ੍ਰਤ ਰੱਖਿਆ ਜਾਵੇ ਤਾਂ ਫਿਰ ਫਲ ਫਲ ਪ੍ਰਾਪਤ ਹੋ ਜਾਂਦਾ ਹੈ ਆਤਮ ਪ੍ਰਾਪਤ ਖੋਜ ਲਵੇ ਕਿ ਦਾ ਪਤਾ ਹੀ ਨਹੀਂ ਪਖੰਡ ਵਾਲਾ ਬ੍ਰਤ ਪਤਾ ਬਾਹਰ ਫਰੀਦ ਦਾ ਦੀ ਪ੍ਰਾਪਤੀ ਨਹੀਂ ਹੋ ਸਕਦੀ ਸਤਿ ਦੀ ਪ੍ਰਾਪਤੀ ਨਹੀਂ ਹੋ ਸਕਦੀ ਹਾਂਜੀ ਨਿਰਮਲ ਨਿਰਾਹਾਰ ਨਹੀਂ ਕੇਵਲ ਸੂਚੈ ਸਾਚੇ ਨਾ ਲੱਗੇ ਮਲ ਨਿਰਮਲ ਨਿਰਾਹਾਰ ਦੇਹ ਕੇਵਲ ਉਹ ਨਿਰਾਹਾਰ ਤਾਂ ਅੰਦਰਲਾ ਹੀ ਬਹਾਲ ਨਹੀਂ ਨਿਰਾਹਾਰ ਹੋ ਸਕਦਾ ਉਹ ਜਿਹੜਾ ਪੌਣਾਹਾਰੀ ਕਹਿੰਦੇ ਨੇ ਅੰਦਰਲਾ ਬਹਾਲ ਲਾ ਕੇ ਉਹ ਜੁੜਿਆ ਹੈ ਬਾਹਲੇ ਸਰੀਰ ਨੂੰ ਪੌਣਾਹਾਰੀ ਕਰਦੇ ਨੇ ਓਏ ਆਤਮਾ ਕਰਕੇ ਤੁਸੀਂ ਨਿਰਾਹਾਰ ਹੋ ਸਕਦੇ ਹੋ ਬਾਹਾਂ ਦੀ ਭੁੱਖ ਪਿਆਸ ਸਕਦੇ ਹੋ ਸਰੀਰ ਕਰਕੇ ਤਿਆਗਦੇ ਨੇ ਸਰੀਰ ਦਾ ਆਤਮਾ ਨਾਲ ਕੀ ਮੇਲ ਹੈ ਸਰੀਰ ਨੂੰ ਜੋੜ ਕੇ ਸਰੀਰ ਤਾਂ ਜਿਹੜਾ ਕੰਮ ਲੈਣਾ ਸੀ ਲੈ ਲਿਆ ਪਾਣੀ ਹੈ ਰੋਟੀ ਹੈ ਇਹਨੂੰ ਚਾਹੀਦੀ ਹੈ ਸਰੀਰ ਦੀ ਸਰੀਰ ਨਾਲ ਆਤਮਾ ਨੂੰ ਜੋੜੀ ਜਾਂਦੇ ਨੇ ਹਰ ਵਕਤ ਨਿਰਮਲ ਨਿਰਾਹਾਰ ਲੈ ਕੇਵਲ ਇਹ ਨਿਰਮਲ ਆਨੰਦ ਆਨ ਦਾਹਾਰ ਕਰਕੇ ਨਿਰਾਹਾਰ ਕਿਵੇਂ ਹੋ ਜੂਗਾ ਬਕੇ ਸਕਦਾ ਜੀ ਹਾਂ ਜੀ ਸੂਚ ਸੱਚੇ ਨ ਲੱਗੇ ਜਿਹੜਾ ਸੱਚਾ ਆਏਗਾੁੱੱਚਾ ਅੰਦਰ ਪੁੱਛਿਆ ਜਿਹਨਾਂ ਦੇ ਔਰ ਸਾਕੇ ਹੈ ਅੰਦਰ ਫੇਰ ਮਾਰ ਜਿਵੇਂ ਲੱਗ ਜੂਰ ਫਿਰ ਉਹਨੂੰ ਨਹੀਂ ਮਾਰ ਲੱਗਦੀ ਉਹਨੂੰ ਆਇਦੀ ਨਹੀਂ ਭੁੱਖ ਹੁੰਦੀ ਠੀਕ ਹੈ ਜੀ ਐਥੇ ਪੌੜੀ ਸਮਾਪਤੀ ਹੈ ਜੀ ਹਾਂ ਸ਼ੁਰੂ ਕਰਦੇ ਹਾਂ ਜੀ ਜਿਹਾ ਦੇਖੋ ਤੈ ਇੱਕੋ ਏਕਾ 4 ਜੀਵ ਪਾਏ ਯਾ ਦੇਖੋ ਤੇ ਵੀ ਦੇਖਦੇ ਆ ਕੋਈ ਕੋਈ ਨਹੀਂ ਨਾ ਸਾਨੂੰ ਸਾਰਿਆਂ ਦੇ ਅੰਦਰ ਦੂਆ ਹੈ ਹੀ ਨਹੀਂ ਕਿਤੇ ਕੋਈ ਹੋਰ ਜੀਵ ਪਾਇ ਨੇ ਵੱਖਰੇ ਵੱਖਰੇ ਭਾਵੇਂ ਪੈਦਾ ਕੀਤੇ ਹੋਏ ਨੇ ਪਰ ਉਹਨਾਂ ਦੇ ਸਰੀਰ ਕਰਕੇ ਭਾਵੇਂ ਵੱਖਰੇ ਵੱਖਰੇ ਸਾਨੂੰ ਪਰ ਆਤਮਾ ਤਾਂ ਸਭ ਦੇ ਵਿੱਚ ਇੱਕੋ ਹੈ ਉਹ ਅਲੱਗ ਗੱਲ ਹੈ ਕਿ ਕਿਸੇ ਨੂੰ ਘਟ ਹੈ ਕਿਸੇ ਨੂੰ ਗਿਆਨ ਵੱਧਾ ਬੁੱਧੀ ਦਾ ਫਰਕ ਲੈਵਲ ਦਾ ਫਰਕ ਹੋ ਸਕਦਾ ਪਰ ਦਾ ਕੋਈ ਦੂਜੀ ਵੈਰਾਈਟੀ ਚ ਨੇ ਪਰ ਤਰਾ ਡਡ ਹੈਗੀ ਹੈ ਮਿੱਟੀ ਕੋਈ ਹੈ ਭਾਤੀ ਹੈ ਜਮੇਤ ਕ ਅਨੇਕ ਭਾਂਡ ਕਰ ਸਾਜੀ ਸਾਜਣਾਰੇ ਸਾਜਣਾਰੇ ਵਿੱਚ ਕੋਈ ਮਿੱਟੀ ਦਾ ਸਾਡੀ ਚ ਸਾਜੇ ਆਹ ਦੇਖੋ ਵੇਖਾ ਵੱਖਰੇ ਵੱਖਰੇ ਜੂਤ ਸ਼ਕਲ ਕਰਕੇ ਜਰੂਰ ਵੱਖਰੇ ਵੱਖਰੇ ਨੇ ਹਾਂਜੀ ਠੀਕ ਹੈ ਫਲੋਹਾਰ ਕੀਏ ਫਲ ਜਾਏ ਰਸ ਖਾਏ ਸਵਾਦ ਗਵਾਈ ਫਲੋਹਾਰ ਕੀਏ ਫਲ ਜਾਏ ਜੇ ਫਲੋਹਾਰ ਹੋ ਜਾਏ ਫਲ ਨਹੀਂ ਮਿਲਦਾ ਉਹ ਗਿਆਨ ਫਲ ਤੱਕ ਨਹੀਂ ਪਹੁੰਚਦਾ ਜਿਹੜੇ ਸੰਸਾਰੀ ਫਲਵਾਰੀ ਹੋ ਗਏ ਗਿਆਨ ਫਲ ਚਲਾ ਗਿਆਨ ਫਲ ਨਹੀਂ ਲੱਗਦਾ ਹੈ ਨਾਨਕ ਗੁਰ ਸਤੋਖ ਰੁਖ ਸੰਤੋਖ ਰੁਖ ਧਰਮ ਫੁੱਲ ਫਲ ਗਿਆਨ ਬਾਹਰ ਦੇ ਫਲਵਾਰੀ ਨਹੀਂ ਕਰਨਾ ਸੀ ਹਰੋ ਹਾਤਾਉ ਕਰਨਾ ਤਾਂ ਜਿਹੜਾ ਗਿਆਨ ਫਲ ਸਾਨੂੰ ਮਿਲਿਆ ਗੁਰਬਾਣੀ ਤੋਂ ਇਹਦਾ ਆਹਾਰ ਕਰਨਾ ਸੀ। ਜਾਂ ਸਤਗੁਰ ਜਦੋਂ ਕੋਈ ਭਗਤ ਬੋਲਦਾ ਹੈ ਭਗਤ ਕੋਲ ਦਾ ਜ ਗਿਆਨ ਹੁੰਦਾ ਉਹਦਾ ਆਹਾਰ ਕਰਨਾ ਸੀ। ਗੁਰਬਾਣੀ ਸੁਣ ਜੇ ਕੋ ਖਾਵਾ ਜੇ ਕੋ ਪੁੱਛੇ ਤਿਸ ਕਉ ਹਰ ਫਲ ਜਿਹੜਾ ਮਿਲਿਆ ਗਿਆਨ ਫਲ ਇਹਦਾ ਆਹਾਰ ਕਰਨਾ ਸੀ ਆਤਮਾ ਦਾ। ਉਹ ਛੱਡ ਕੇ ਸਰੀਰ ਦਾ ਕਰਨ ਲੱਗੇ ਵੀ ਫਲ ਆ ਹੈ ਜੀ ਇਹਦਾ ਸਾਧ। ਅਖੰਡ ਗੱਲਿਆ ਗਿਆਨ ਫਲ ਤੋਂ ਰਹਿ ਗਏ ਵਾਂਝੇ ਗਿਆਨ ਫਲ ਨਹੀਂ ਮਿਲ ਸਕਦਾ ਉਹਨੂੰ। ਉਦੋਂ ਮਾਇਆ ਦੇ ਫਲਾਂ ਨੂੰ ਫਲ ਮੰਨਦੇ ਨੇ ਗਿਆਨ ਫਲ ਦੀ ਗੱਲੇ ਛੁੱਟ ਗਈ ਉਹਨਾਂ ਦੇ। ਉਹ ਰਸ-ਕਾਸ ਖਾਏ, ਅਰਾਤ-ਕਾਸ ਦੇ ਫਲਾਂ ਦੇ ਵਿੱਚ। ਤੇ ਖਾਏ, ਹੁੰਦਾ। ਇਹ ਸਹੀ ਨਹੀਂ ਹੈਗਾ। ਨਾਮ ਦਾ ਆਉਂਦਾ ਹੁੰਦਾ, ਆਤਮਾ ਨੂੰ ਉਹਦਾ ਹੁੰਦਾ। ਆਤਮਾ ਨੂੰ ਦਾ ਸਵਾਦ ਨਹੀਂ ਰਸ ਕਸਾਂ ਦਾ ਮਾਇਆ ਦੇ ਜੀਭ ਦਾ। ਹਾਂਜੀ। ਕੂੜੇ ਲਾਲਚ ਲਪਟੇ ਲਪਟਾਏ ਛੂਟੇ ਗੁਰਮੁਖੀ ਸਾਚ ਕਮਾਏ ਕੀ ਕਰਦੇ ਨੇ ਉਹ ਰਸਗਰ ਖਾਣੇ ਵਾਲੇ ਫਿਰ ਜਿਹੜੇ ਫਲੋਵਾਰੀ ਨੇ ਆਪਣੇ ਜਿਹੜੇ ਚੀਨੇ ਨੇ ਉਹਨਾਂ ਨੂੰ ਕੂੜੇ ਲਾਲਚ ਨਾਲ ਲਪਟਾ ਕੇ ਰੱਖਦੇ ਨੇ ਆਪ ਕੂੜੇ ਨਾਲ ਲਪਟੇ ਹੋਏ ਨੇ ਬੜੇ ਬੜੇ ਉਹਨਾਂ ਤੋਂ ਧਾਨ ਲੈਂਦੇ ਨੇ ਬੜੇ ਬੜੇ ਉਹ ਆਪਣੇ ਮੰਦਰ ਬਣਾਉਂਦੇ ਨੇ ਬڑے-ਬڑے ਆਪਣੇ ਉਹ ਆਸ਼ਰਮ ਬਣਾਉਂਦੇ ਨੇ, ਬਹੁਤ ਕਮਰੇ ਬਣਾਉਂਦੇ ਨੇ, ਦੁਨੀਆਂ ਦੀ ਸ਼ੋਭਾ ਦੀ ਗੱਲ ਕਰਦੇ ਨੇ, ਖੜਦੇ ਨੇ। ਆਪ ਲਾਲਜ ਨਾਲ ਲਿਪਟੇ ਹੋਏ ਨੇ, ਆਪਣੇ ਤੇ ਦਰੂ ਨਕਤਾ ਕੇ ਰੱਖਦੇ ਨੇ। ਅਰਦਾਸਾਂ ਕਰਦੇ ਨੇ ਉਹਨਾਂ ਦੀਆਂ। ਛੂਟਾ ਗੁਰਮਖੀ ਸਾਚ ਕਮਾਈ। ਜੇਕਰ ਗੁਰਮਖ ਨੂੰ ਮਰ ਜਵੇ, ਗੁਰਮਖ ਛੋਟਾ ਹੈ, ਸੱਚ ਦੀ ਕਮਾਈ ਨਾਲ ਬਚੇ। ਮਾਇਆ ਦੀ ਕਮਾਈ ਨਾਲ ਨਹੀਂ ਛਡਕਾਰਿਆ ਹੈ। ਉਹ ਤਾਂ ਮਾਇਆ ਦੀ ਕਮਾਈ ਵੱਲ ਲੱਗੇ ਨੇ, ਛਡਕਾਰਿਆ ਕਮਾਈ ਹੋ ਮਾਇਆ ਜ ਫਸੇ ਰਹਿਣਗੇ ਪਿੱਛਾ ਮਾਇਆ ਦੀ ਜਦ ਗੁਰਮੁਖੀ ਨੰਦਰ ਮਹਾਰਾਜੀ ਚੱਲ ਨਹੀਂ ਹੁੰਦੀ ਇੱਕ ਕਰਕੇ ਗੁਰਮੁਖੀ ਫਸ ਜਾਮ ਲਾਏ ਹੋਰ ਇਹਨਾਂ ਗੱਲਾਂ 'ਚ ਫਸਦੇ ਹੁੰਦੇ ਸੱਚ ਦੀ ਗੋਆਈ ਕਰਦਾ ਜਿਹੜੀ ਨਾਲ ਜਾਣੀ ਹੈ ਠੀਕ ਹੈ ਜੀ ਇੱਥੇ 14ਵੀਂ ਪੌੜੀ ਸਮਾਪਤੀ ਹੈ